ਗੁਰੂ ਕੀ ਸਾਜਨਵਾਜੀ 사త్సੰਗ ਜੀਉ ਜਿਸ ਵਾਤਾਵਰਣデア ਇਸ ਵਕਤ ਬੈਠੇ ਹੋ 사త్సੰਗਤ ਰੂਪ ਹੋਰ ਨਾਲ ਹੀ ਸੰਗੀਤ ਦੇ ਅੰਦਰ ਵੱਡੀਆਂ ਰੀਤਾਂ ਚ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ 1942 ਤੋਂ 50 ਤੱਕ ਤੇਸੀਰੀ ਰੀਤਾਂ ਬਸੁੰਦਰੀਆਂ ਹਾਂ ਬਚਪਨ ਦੇ ਅੰਦਰ ਤਰਨਤਾਲੋਂ ਸਾਇ ਵਿਖੇ ਹਜ਼ੂਰੀ ਰਾਗੀ ਕੀਰਤਨ ਦੀ ਰੰਮਤਾ ਇਸੇ ਤਰ੍ਹਾਂ ਹੀ ਕਰਦੇ ਸਨ ਹੌਲੀ ਹੌਲੀ ਆਇਸਤਾ ਸੰਗੀਤ ਦੀਆਂ ਇਹ ਰੀਤਾਂ ਕੀਰਤਨ ਦੇ ਅੰਦਰੋਂ ਅਲੋਪ ਹੋ ਗਈਆਂ ਆйда ਕੀਰਤਨ ਗੁਰਦੁਆਰਿਆਂ ਜਾ ਕੇ ਸੁਣ ਲਓ ਹੋਰ ਇਹ ਸੰਗੀਤ ਦਾ ਹੈ ਆਪ ਜੀ ਨੇ और ਸਤਿਗੁਰਾਂ ने जो ਕਿਰਪਾ ਕੀਤੀ है संगत ਦੇ ਉੱਤੇ कि ਗੁਰੂਆਂ ਦੇ ਵਕਤ ਤੋਂ ਜੋ ਚੀਜ਼ਾਂ ਚੱਲੀਆਂ ਆ ਰਹੀਆਂ ਹਨ ਉਹਨਾਂ ਦੇ ਉੱਤੇ ਅਭਿਆਸ ਕਰ ਰਹੇ ਹਨ ਉਹਨਾਂ ਨੂੰ ਸਿੱਖ ਰਹੇ ਹਨ ਉਹਨਾਂ ਨੂੰ ਘੋਂਦੇ ਹਨ ਔਰ ਪ੍ਰਾਤਨਤਾਂ ਨੂੰ ਅੱਜ ਵੀ ਨਵੀਨ ਸਮੇਂ ਦੇ ਅੰਦਰ ਜਾਗਤਰ ਰੱਖਿਆ ਹੈ ਇਹ ਅੱਜ ਦੇ ਕੀਰਤਨ ਨੂੰ ਸੁਣ ਕੇ ਮੈਨੂੰ ਤਾਂ ਇਹ ਲੱਗਦਾ ਸੀ ਕਿ ਮੈਂ ਕੀਰਤਨ ਕਰਾਂ ਹੀ ਨਾ ਕਰਾਂ ਸਿਰਫ ਸੁਣਦਾ ਹੀ ਰਾਂ ਪਰ ਹਾਜ਼ਰੀ ਜ਼ਰੂਰ ਭਰਨੀ ਹੈ ਹਾਜ਼ਰੀ ਪ੍ਰਵਾਨ ਕਰਨਾ ਉਸ ਤਰ੍ਹਾਂ ਤਾਂ ਮੈਨੂੰ ਇਸ ਸਗਤ ਬਹੁਤਾ ਖਿਆਲ ਨਹੀਂ ਆ ਰਿਹਾ ਮੈਂ ਕੀ ਗਾਵਾਂ ਪਾ ਕੁਝ ਮਿਸਰਤ ਜੀ ਚੀਜ਼ ਹੈ ਆਪ ਜੀ ਦੇ ਸਾਹਮਣੇ ਕੀਰਤਨ ਹੀ ਹਾਜ਼ਰ ਕਰਾਂਗਾ ਆਪ ਜੀ ਨੇ ਮਾਲ ਸੋਂ ਕੌਨਸ ਰਾਗ ਸਰਵਣ ਕੀਤਾ ਹੈ ਸ਼ੁਰੂ ਦੇ ਅੰਦਰ ਦਰੀਸਾ ਨਾਨੀ ਸਮ ਗਮ ਕਸ ਸਧਨੀ ਸਮ ਗਮ ਦਨੀ ਸਨੀ ਦਮ ਗਮ ਗਸ ਸਧਨੀ ਸਮ ਇਹ ਮਾਲਕ ਉਸ ਦੀ ਉਸਰਾਹਨ ਔਰ ਇਸੇ ਇੱਕ ਸੁਰ ਬਦਲ ਦੇ ਨਾਲ ਹੀ ਚੰਦਰ ਕੌਂਸ ਬੰਦਦਾ ਹੈ ਨਾਨੀ ਸਮ ਗਮ ਦਨੀ ਦਮ ਗਮ ਗਸ ਔਰ ਇਸੇ ਨੂੰ ਇੱਕ ਸੁਰ ਦੂਸਰਾ ਬਦਲ ਦੇ ਨਾਲ ਵਰ चीज ਬੰਦੀ है ਗਾਮ ਗਸ ਗਾਮ ਗਸ ਤਰੀ ਸਮ ਗਾਮ ਗਸ ਗਮ ਗਮ ਗਸ ధਨੀ ਸਮ ਮੇਰਾ ਤਿੰਨ ਹੀ ਕੌਨਸਾ ਨੂੰ ਮਿਲਾ ਕੇ ਆਪ ਜੀ ਦੇ ਸਾਹਮਣੇ ਸ਼ਬਦ ਰੱਖਣ ਲੱਗਾ ਹਾਂ ਤਾਲ ਸਾਜਨ ਦੇਸ ਵਿਦੇਸੀ ੜੇ ਸਾਜਨ ਦੇਸ ਦੇਸੀ ੜੇ ਸਾਜਨ ਸਰ ਸਮਾਲੇ ਤੈਨ ਸੱਜਣਾ ਸਰ ਸਮਾਲੇ ਤੈਨ ਸੱਜਣਾ ਸਰ ਸਮਾਲੇ ਤੈਨ ਸੱਜਣਾ ਮੋ ਮੁੰਦਨਨ ਪਰੇ ਦੀ ਮੁੰਦਨਨ ਪਰੇ ਦੀ ਸਾਜਨ ਦੇਸ ਵਿਦੇਸ ਏੜੇ ਸਾਜਨ ਦੇਸ ਵਿਦੇਸ ਏੜੇ saajan des vedes yedey saajan des vedes yedey saane rede de de, dedi de, saane rede dedi saajan des vedes yedey ਰਕ ਰਹੇ ਦੀ ਗੁਣ ਕਿਉ ਪ੍ਰਭ ਮੇਲਾ ਪਿਆ ਰੇ ਦਨੇ ਦਮ ਗਬਦਨੀ ਨੀ ਸਨ ਦਨੀ ਸਸ ਸਸ ਸੈ ਮ gomag samam gomag gomag sas sadanini danini sanisasa sajan des vede sirede sajan des vede sirede sajan des ਬਦੀ ਮੇਲੇ ਵਿੱਚੂਨੀ ਸਤ ਗੁਰ ਸਬਦੀ ਅਨਮਾਨੇ ਆਗੇਰਾ ਕੇ ਤਨ ਮਨ ਆਗੇਰਾ ਕੇ ਨਾਨਕ ਅੰਮ੍ਰਿਤ ਬਿਰਖ ਮਹਾਰਤ ਫੈਲਿਆ ਨਾਨਕ ਦੇ ਅੰਮ੍ਰਿਤ ਬਿਰਖ ਮਹਾਰਸ ਫੈਲੇ ਆ ਮੇਲੇ ਪ੍ਰੀਤਮ ਰਸ ਚਾਕੇ